शलोक महला पहला शास्त्र बेद पुराण पढ़ंता पुकारंता अजानंता जा बुझे ता सूझे सोई नानक आखा कूक ना होई पिछो आया शास्त्र पैना होया उनेनू ए दी पता शास्त्र इत्ते शास्त्र दा ज्ञान है जेड़ा जे ओ वेद होता ता वेद पहला शास्त्र पिछो हुंदा ਸ਼ਾਸਤਰ 베ਦ ਪੁਰਾਣ ਸ਼ਾਸਤਰ ਦਾ ਜਿਹੜਾ ਪੁਰਾਣਿਆਂ ਵਿੱਚ ਲਿਖਿਆ ਗਿਆ ਹੈ ਸਾਖੀਆਂ ਵਿੱਚ ਬਣਾਈਆਂ ਗਈਆਂ ਨੇ ਉਹ ਪੜਦਾ ਪੜਦੋਤ ਉਹ ਪੁਰਲੇ ਦੇ ਮੁਕਾਬਲੇ ਜਿਹੜਾ ਅਪਰ ਦੱਸਿਆ ਗਿਆ ਨਾ ਉਹਦੇ ਮੁਕਾਬਲੇ ਜ ਹੋਰ ਆ ਰਹੇ ਸ਼ਾਸਤਰ 베ਦ ਪੜ੍ਹਨਤਾ ਸ਼ਾਸਤਰ 베ਦ ਪੁਰਾਣ ਪੜ੍ਹਨਤਾ ਉਹ ਕਹਾਂਦਾ ਪਰ ਜੋਰ-ਜੋਰ ਨਾਲ ਪੁਕਾਰਦਾ ਹੈ ਬੜੀ ਬਹੁਤ ਦਾਵੇ ਕਰ ਕਰ ਪੁਕਾਰਦਾ ਅਜਾਣ ਤਾਂ ਜੋ ਪੁਕਾਰਦਾ ਉਹਦੇ ਪ੍ਰਤੀ ਆਪ ਬਿਲਕੁਲ ਅਣਜਾਣ ਜਣਦਾ ਹੈ ਜੀ ਕ੍ਰਿਸ਼ਨ ਵਾਲੇ ਅਣਜਾਣ ਰਾਮ ਵਾਲੇ ਅਣਜਾਣ ਸਮਝਾ ਜੀ ਜਿਹੜੇ ਲਫ਼ਜ਼ ਨੇ ਇਹਨਾਂ ਬਾਰੇ ਕੁਝ ਕੁਛ ਨਹੀਂ ਪੁਕਾਰੀ ਜਾਂਦਾ ਫੜੀ ਜਾਂਦਾ ਹਾਂ ਜੀ ਜਾਂ ਤਾਂ ਸੂਝੇ ਸੋਈ ਨਾਨਕ ਆਖੇ ਕੂਕ ਨਾ ਹੋਈ ਜਾਂ ਬੁੱਝੇ ਜੇ ਕਰੇ ਭੁਜਲੰਗਾ ਕੋਈ ਨਾ ਚੋ ਜੋ ਬੋਲ ਰਿਹਾ ਹੈ ਨਾ ਭੁਜਣ ਵਾਲੇ ਮੇਨਾ ਚੋਈ ਨਹੀਂ ਲੀ ਪੜਨਗੇ ਤਾਂ ਭੁਜਣਗੇ ਵੀ ਹੁਣ ਗੁਰਬਾਣੀ ਜੇ ਪੜਨਗੇ ਤਾਂ ਭੁਜਣਗੇ ਵੀ ਜੇ ਨਹੀਂ ਭੁਜਣਗੇ ਉੜਦੇ ਰਹਾਂਗੇ ਜੇ ਭੁਜਿ ਜਾਣਗੇ ਸੌਂਦੇ ਜਾਣਗੇ ਜਾਂ ਹੋਜੇ ਤਾਂ ਸੁੱਜੇ ਸੋਈ ਜੇ ਭੁਜਲੰਗਾ ਸੌਂਦੀ ਵੀ ਜਾਂਦਾ ਉੜ ਜਾਵੇ ਸੌਂ ਜਾਂਦਾ ਨਹੀਂ ਉੜਜੇ ਹੋਏ ਰਹਿ ਜਾਂਦੇ ਨੇ ਹਾਂਜੀ ਨਾਨਕ ਆਖੇ ਕੂਕ ਨਾ ਹੋਈ ਨਾਨਕ ਆਹਦਾ ਫਿਰ ਉਹਦੇ ਅੰਦਰ ਕੂਕ ਨਹੀਂ ਹੁੰਦੀ ਕੋਈ ਬਹੁਤਾ ਅਕਲ ਕਰਦਾ ਕਿਉਂ ਨਹੀਂ ਹੁੰਦਾ ਕਿਉਂ ਐ ਕਰਦੇ ਨੇ ਲੋਕ ਕਿਉਂ ਉਹ ਕਰਦੇ ਨੇ ਕੋਈ ਨਹੀਂ ਹੁੰਦਾ ਉਹ ਤਸੱਲੀ ਨਾਲ ਬੈ ਜਾ ਉਹਨੂੰ ਸਮਝ ਆ ਜਾਂਦੇ ਆ ਕਿ ਔਖੀ ਗੱਲ ਹੈ ਜਈ ਪਟਾਂ ਦੇ ਹੀ ਬਾਰਖੂ ਤਹੀਂ ਗਾਸ ਨਹੀਂ ਬੋਲ ਪਰ ਇਹ ਸ਼ਲੋਕ ਤਾਂ ਸਿੱਖਾਂ ਤੇ ਲੱਗਣਾ ਚਾਹੀਦਾ ਜਿੱਥੇ ਵੀ ਪ੍ਰਕਾਸ਼ ਕੀਤਾ ਉੱਥੇ ਕੋਈ ਪਟਣ ਪਾਰਖੂ ਤਾਂ ਹੈ ਨਹੀਂ ਸਿੱਖਾਂ ਦੇ ਜਿਹੜਾ ਨਹੀਂ ਲੱਗਦਾ ਲੱਗਦਾ ਹੀ ਹੈ ਹੁਰਤਾ ਲੱਗਦਾ ਸਾਰੀ ਵਾਰ ਠੀਕ ਹੈ ਨਹੀਂ ਫਿਰ ਆ ਵੀ ਜਿਹੜੀ ਗੱਲ ਹੈ ਵੀ ਅਸੀਂ ਗੁਰਬਾਣੀ ਪੜ੍ਹ ਕੇ ਆ ਜਨਤਾ ਲੋਕ ਉੱਚੀ ਉੱਚੀ ਕਹਿੰਦੇ ਨਾਮ ਜਪਣਾ ਚਾਹੀਦਾ ਤੇ ਬੋਲਦੇ ਆ ਉੱਚੀ ਉੱਚੀ ਏ ਹੀ ਗੱਲ ਨਹੀਂ ਹੈ ਜੀ ਸ਼ਾਸਤਰਾ ਦਾ ਬੇਦਈ ਪੜਾਉਦੇ ਨੇ ਗੁਰਬਾਣੀ ਕਿੱਥੇ ਪੜਾਉਦੇ ਨੇ ਸ਼ਾਸਤਰ ਬੇਦ ਸਾਰੇ ਪੜ੍ਹਾਏ ਜਾਂਦੇ ਨੇ ਉਹ ਜਿਹੜਾ 250 ਦੀ 12ਵੇਂ ਉਹ ਕੀ ਦੇ ਜਿਹੜੀਆਂ ਸਾਖੀਆਂ ਨੇ ਵੀ ਜਿੱਟੀਆਂ ਸ਼ਾਸਤਰ ਬੇਦਾਂ ਦੇ ਆਧਾਰ ਤੇ ਬਣਾਈ ਹੋਈ ਹੈ ਸਾਡੀਆਂ ਸਾਖੀਆਂ ਉਸੇ ਦੀ ਰੌਲਾ ਪਾਈ ਜਾਂਦੇ ਨੇ ਕੋਹ ਭਕਾਰ ਕਰੀ ਜਾਂਦੇ ਨੇ ਸਿਰਫ ਉੱਥੇ ਲਿਖਿਆ ਨਾ ਨੇ ਉਹ ਸਾਰੀ ਪੁੱਠੀ ਫੇਰੀ ਹੈ ਤੇ ਬਿਜਲੀ ਵਾਲੇ ਸਿਰਫ 12 ਤਾਂ ਪੜਾਉਂਦੇ ਨੇ ਸਾਰੀਆਂ ਹੀ ਕੁਰਬਾਨੀ ਦੇ 24ੋ ਸ਼ਬਦ ਪੜਾਉਂਦੇ ਨੇ ਜਿਵੇਂ 12 ਦੀ ਉਸ ਗਿਆ ਦੇਣ ਵਾਸਤੇ ਆਏ ਹੁੰਦੇ ਨੇ ਕੁਰਬਾਨੀ ਦਾ ਬਰਾਏ ਰਬੂ ਦੀ ਸ਼ਬਦ ਜੇ ਦਿਲੋਂ ਜਾਣ ਇਹ ਤਾਂ ਸਾਰੇ ਇਹਨਾਂ ਦਾ ਸਾਰਾ ਯਤਨ ਹੈ ਕੁਰਬਾਨੀ ਤੋਂ ਟੇਰਾ ਫੋਮ ਰਬੂ ਦੀ ਦੋਇਕਲੀ ਪ੍ਰੋਗਰਾਮ ਦਾ ਉਹ ਵੈਗਰੂ ਵੈਗਰੂ ਤੇ ਕਾਹ ਕੋ ਜਾਣੀ ਨਹੀਂ ਚਾਹਦੇ ਤੇ ਦੋ ਇੱਕੋ ਹੀ ਸੰਤਾਂ ਸ਼ਕਤੀ ਜਗਤ ਪਰੋਵੈ ਚਾਹੋ ਨਾ ਹੀ ਯਾਦ ਕਰੈ ਬੈਠੀ ਹੁੰਦੀ ਕਦ ਰੈਡੀ ਹੁੰਦਾ ਜਦ ਬੰਦੀ ਹੁੰਦਾ ਜਾਣਾ ਕਹ ਲੋ ਚਾਹਾਂ ਬਨ ਮਰ ਜਾਂਦਾ ਬਨ ਚੁੱਪ ਹੋ ਜਾਂਦਾ ਬਨ ਇੱਛਾ ਮਾ ਆਪਣੀਆਂ ਤਿਆਗ ਦਿੰਦਾ ਤੇਰਾ ਸਭ ਕੁਝ ਮੇਰਾ ਤੇ ਸਾਰਾ ਕੁਝ ਮੇਰਾ ਜੇ ਤੂੰ ਮੇਰਾ ਹੋਏਲ ਸਭ ਤੇਰਾ ਹੋ ਤੂੰ ਔਰ ਮੈਂ ਕੋਈ ਹਾਂ ਫਿਰ ਮੇਰਾ ਹੀ ਹੈ ਜਦ ਤੂੰ ਔਰ ਮੈਂ ਕੋ ਹੋਗੇ ਦੋ ਨ ਰਹੇ ਸਭ ਕੁਝ ਬੇਰਾਹੀ ਆ ਮੈਂ ਤੇਰਾ ਹੋ ਗਿਆ ਸਭ ਕੁਝ ਬੇਰਾ ਹੋ ਗਿਆ ਹਾਂ ਜੀ ਹੋਂ ਨਹੀਂ ਤੂੰ ਹੋਂ ਮੈਂ ਬੈਲੀ ਹੁ ਤਾਂ ਫਿਰ ਤੂੰ ਹੋਂ ਨਹੀਂ ਤੂੰ ਤੂੰ ਹੀ ਨਾ ਰਹੇ ਬੈਲੀ ਹੁ ਤਾਂ ਠੀਕ ਹੈ ਜੀ ਪਰ ਇੱਥੇ ਹੋਂ ਨਹੀਂ ਮਨ ਵਸਤੇ ਕੀ ਜੀ ਹਾਂ ਹਾਂ ਗੱਲ ਜਦ ਹੋਂ ਮੈਂ ਚਲੇਗੀ ਫਿਰ ਚਿੱਤੇ ਰਹਿ ਜਾਂਦਾ ਹੈ ਜੀ ਗਾਇ ਜਲੀ ਜਾਂਦੀ ਹੈ ਚਤਰਾਇਨਾ ਹੋਣੀ ਹੈ ਹੋਮੀ ਜਲੀ ਜਾਂਦੀ ਹੈ ਚਤਰੀ ਅੱਛਾ ਗੁਰੂ ਹੈ ਜਾਂਦਾ ਸ਼ਬਦ ਗੁਰੂ ਹੈ ਜਾਂਦਾ ਇਹ ਉਹ ਜੇ ਸਮਝ ਆਂਦਾ ਨਾ ਇਹ ਹੁਕਮ ਫਿਰ ਇਹ ਘਾਹ ਸਮਝ ਆਂਦਾ ਤਾਂ ਸਾਰਾ ਕੋ ਆਪਣਾ ਬਣਦਾ ਚਿੱਤ ਚ ਹੁੰਦੀ ਹੈ ਬੁੜੀਆ ਬਣਦੀ ਹੈ ਦੋ ਜਲੀਆ ਨੇ ਹੋਰ ਮੈਂ ਦੋ ਜਲੀਆ ਗਈਓ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਮ ਤੋਂ ਤੇ ਆਪੇ ਸੱਟਾ ਆਪੇ ਸੁਰਤ ਆਪੇ ਦਾ ਸੱਟਾ ਹੈ ਜੀ ਵੀ ਸ਼ਕਤੀ ਦਾ ਮਾਲਕ ਹੈ ਬੁੱਧੀ ਦਾ ਮਾਲਕ ਸ਼ਕਤੀ ਦਾ ਬੁੱਧੀ ਹੈ ਆਪੇ ਸੁਰਤਾਂ ਆਪੇ ਨਾਲੇ ਸ਼ਕਤੀ ਜਗਤ ਪ੍ਰੋਵਾਂ ਆ ਜਿਹੜਾ ਸੰਸਾਰ ਦੇ ਵਿੱਚ ਆਪਣੀ ਕਲਾ ਪਾਈ ਹੋਈ ਹੈ ਬੁੱਧੀ ਪਾਈ ਹੋਈ ਹੈ ਸ਼ਕਤੀ ਪਾਈ ਹੈ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ ਹਾਂ ਸ਼ਕਤੀ ਜਗਤ ਪ੍ਰੋਵ ਜਗਤ ਪ੍ਰੋਵਿਆ ਹੋਇਆ ਆਪਣੀ ਸ਼ਕਤੀ ਠੀਕ ਹੈ ਜੀ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੇ ਆਪੇ ਛੱਡਣਾ ਆਪੇ ਪਹਿਲਾਂ ਭੇਜਣਾ ਨੂੰ ਆਪਣੇ ਨੂੰ ਆਇਆ ਕਿ ਆਪੇ ਛੱਡ ਲੈਣ ਜੇ ਟਾਈਮ ਹੋ ਜਾਂਦਾ ਵੀ ਆਜੋ ਹੁਣ ਜਿਹੜਾ ਆਪਣਾ ਟਾਈਮ ਖਤਮ ਹੋ ਗਿਆ ਜਿਹੜਾ ਕੋਈ ਸੀ ਬੰਦ ਗਿਆ ਆਪੇ ਭੇਜਿਆ ਆਪੇ ਸੱਦੇ ਰਚਨਾ ਰਚ ਰਚ ਵੇਖੇ ਰਚਨਾ ਨੂੰ ਰਾਜਾ ਰਾਜ ਕੇ ਦੇਖਦਾ ਵੀ ਰਣਾ ਧਿਆਨ ਵੀ ਨਹੀਂ ਹਾਂਜੀ ਨਾਨਕ ਸੱਚਾ ਸੱਚੀ ਨਾਹੀਂ ਸੱਚ ਪਵੈ ਤੁਰ ਲੇਖੈ ਨਾਨਕ ਸੱਚਾ ਸੱਚੀ ਲਈ ਸੱਚ ਪਵੈ ਤੁਰ ਲੇਖੈ ਲੋਕ ਆਪ ਸੱਚਾ ਸੱਚੀ ਨਹੀਂ ਉਹ ਇਲਸਾਰਦੀ ਸੱਚਾ ਹੈ ਉਹ ਰੋਬੀ ਸੱਚਾ ਗਿਆਨ ਵੀ ਸੱਚਾ ਸੱਚ ਪਵੈ ਵਿੱਚ ਲੇਖ ਸੱਚੇ ਜਿਹਦੇ ਕੋਲ ਸੱਚਾ ਹੋ ਲੇਖ ਪੈ ਗਿਆ ਉਹ ਦਰਗਾਹ ਦੇ ਲੇਖ ਤੁਰ ਲੇਖਾ ਉਹ ਦਰਗਾਹ ਦੇ ਲੇਖ ਪੈ ਗਿਆ ਤੁਹਾਡੇ ਖਾਤੇ ਚ ਐਡ ਹੋ ਗਿਆ ਤੁਹਾਡੇ ਖਾਤੇ ਜਮਾ ਹੋ ਗਿਆ ਸੱਚ ਆਓ ਖਾਤੇ ਰੋਲ ਮਿਲ ਪਾਈ ਸੱਚੇ ਤੋਂ ਲੇਖੇ ਖਾਤੇ ਤੇਰੇ ਸੱਚ ਜਿਵੇਂ ਹੋਣਾ ਨੂੰੜ ਤਾਂ ਬਾਰ ਬਾਰ ਫਿਰਦਾ ਏ ਨੂੰ ਚੱਕੇ ਠੀਕ ਹੈ ਜੀ ਪੌੜੀ ਨਾਮ ਨਿਰੰਜਨ ਲਖ ਹੈ ਕਿਉਂ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਏ ਭਾਈ ਮੇਰੇ ਇੱਥੇ ਹੈ ਕਹਿੰਦੇ ਨਾਮ ਭਾਈ ਲੱਖ ਹੈ ਅੱਖਾਂ ਲੂੜੀ ਦੀ ਕਿਉਂ ਲਖਿਆ ਜਾਈ ਲਖਿਆ ਕਿਵੇਂ ਜਾਵੇ ਜਾਏ ਇਹ ਕੋਈ ਚਾਹੇ ਦਿਖਾ ਦੇ ਕਿਵੇਂ ਦਿਖਾ ਦੇ ਇਹ ਲੱਖ ਹੈ ਨਾਮ ਨਾਲ ਨਾਲ ਹੈ ਨਾਲੇ ਇਹਨੂੰ ਕਿਉਂ ਭਾਈਏ ਭਾਈ ਆ ਪ੍ਰਾਪਤ ਕਿਵੇਂ ਕਰੀਏ ਮੈਨੂੰ ਪੁੱਛੋ ਪ੍ਰਾਪਤ ਨਹੀਂ ਮਿਲੀ ਦੱਸੀ ਜਾ ਸਕਦੀ ਹੈ ਪੁੱਛੀ ਜਾ ਸਕਦੀ ਹੈ ਲੱਖ ਹੈ ਤਸੱਲੀ ਕਿਵੇਂ ਹੋਊਗੀ ਨਾਲ ਦੀ ਇਹ ਵਿਧੀ ਦੱਸੀ ਇਹਦਾ ਗਿਆਨ ਦਿੱਤਾ ਜਾ ਸਕਦਾ ਕਿਉ ਪਾਈਏ ਭਾਈ ਪ੍ਰਾਪਤੀ ਦੀ ਵਿਧੀ ਪੁੱਛੀ ਦੱਸੀ ਜਾ ਸਕਦੀ ਹੈ ਹਾਂਜੀ ਨਾਮ ਨਿਰੰਝਨ ਵਰਤਦਾ ਰਵਿਆ ਸਭ ਠਾਈ ਗੁਰਪੂਰੇ ਤੇ ਪਾਈਏ ਹਿਰਦੈ ਦੇ ਦਿਖਾਈ ਅਭਲੇ ਦੇ ਹੁਕਮੇ ਵਰਤਦਾ ਸਾਰੇ ਜੋ ਬਾਹਰ ਵਰਤ ਰਿਹਾ ਉਹੀ ਤਾਂ ਜਣਾ ਹੁਕਮ ਵਰਤਦਾ ਰਵਿਆ ਸਭ ਠਾਈ ਸਾਡੀ ਜਗ੍ਹਾ ਵਰਤਦਾ ਜੇ ਕਿਤੇ ਵੀ ਪਾਈਆ ਹੋ ਵੀ ਹੁਕਮ ਹੈ ਜੇ ਨਹੀਂ ਉਜਮਾ ਬਲਨਾ ਉਹੀ ਹੁਕਮ ਖਾਟਾ ਬਾਤਾ ਉਹੀ ਹੁਕਮ ਹਮ ਜੋ ਪੂਰਾ ਗਿਆਨ ਹੋ ਜਾਂਦਾ ਪਾ ਲਈਦਾ ਫਿਰ ਸਭ ਕੁਝ ਆ ਜਾਂਦੀ ਹੈ ਹਾਂ ਬਈ ਠੀਕ ਹੈ ਹੋਜੀ ਨਾਨਕ ਨਜ਼ਰੀ ਕਰਮ ਹੋਏ ਗੁਰ ਮਿਲੀਏ ਭਾਈ ਨਾਨਕ ਨਜ਼ਰੀ ਕਰਮ ਹੋਏ ਨਜ਼ਰੀ لفظ ਜਿਹੜਾ ਹੈਗਾ ਇਹ ਪਰਮੇਸ਼ਰ ਵਾਸਤੇ ਹੈ ਜਦ ਵੀ ਕਰਮ ਤੋਂ ਨਿਸ਼ਾਨ ਜਦ ਕਰੇ ਜੇ ਆਪਣੀ ਨਦਰ ਕਲਦੇ ਵਾਲਾ ਨਜ਼ਰੀ ਹੈ ਕਰਮੋ ਦੀ ਕਿਰਪਾ ਨਜ਼ਰੀ ਦਾ ਕਰਮ ਹੋਵੇਗੀ ਨਜ਼ਰੀ ਦੀ ਕਿਰਪਾ ਹੋ ਜਵੇ ਜੋ ਮਿਹਰਬਾਨ ਮਿਹਰਬਾਨ ਨਜ਼ਰ ਕਰਨ ਵਾਲਾ ਉਹਦੀ ਹੋ ਜਵੇ ਹਾਂਜੀ ਗੁਰ ਹੋ ਜਾਂਦਾ ਗੁਰ ਦੇ ਨਾਲ ਸਤ ਨਾਲ ਜਦੋਂ ਆਪਣਾ ਬੋਲ ਲੱਗ ਜਾਂਦਾ ਠੀਕ ਹੈ ਜੀ ਅਤੇ ਕੋ ਗੁਰ ਬਿਲੀਏ ਆ ਤੇ ਗੁਰ ਪਾਇਆ ਸੀਗਾ ਬਿਲੀਏ ਦਾ ਮਾਤਲਬ ਆਪਣੇ ਸਤ ਕੋਲ ਗੁਰ ਪਾਇਆ ਜਿਹੜਾ ਗਿਆਨ ਹੈ ਪ੍ਰਾਪਤੀ ਹੁੰਦੀ ਹੈ ਇਹਦੇ ਨਾਲ ਮਿਲਾਤ ਹੁੰਦੀ ਹੈ ਵੇਲੇ ਮਿਲਿਆ ਗਈ ਹੈ ਸੋਏ ਬਿੜੇ ਰਹਿਣਾ ਫਿਰ ਤੇ ਵਿਛੜਦਾ ਹੀ ਨਹੀਂ ਠੀਕ ਹੈ ਪਹਿਲਾਂ ਗੁਰ ਪੂਰੇ ਤੋਂ ਪਾਇਆ ਸੀਗਾ ਹੁਣ ਪੂਰੇ ਗੁਰ ਨੂੰ ਮਿਲ ਲਿਆ ਇਹ ਜੀ ਹੁਣ ਉਹ ਗਏ ਗਿਆ ਰੱਬ ਦੀ ਜਾਣਕਾਰੀ ਪਾਈਦੀ ਨਾ ਠੀਕ ਹੈ ਉਹ ਉਹ ਕਿਸੇ ਜੜ੍ਹ ਜਾਂ ਚੇਤਨ ਤੋਂ ਪੁੱਛੀ ਜਾ ਸਕਦੀ ਸੀ ਹਾਂਜੀ ਜਾਣਕਾਰੀ ਨਹੀਂ ਜਿਹਦੇ ਨਾਲ ਮਿਲਣਾ ਉਹਦੇ ਨਾਲ ਮਿਲ ਗਿਆ ਠੀਕ ਹੈ ਇਹ ਹੁਣ ਚੇਤਨ ਨੂੰ ਮਿਲ ਗਿਆ ਹੈ ਜੀ ਹਾਂ ਹੁਣ ਜੇ ਤਾਂ ਹੁਤਾ ਤੋਂ ਇੱਕ ਮਿਲ ਗਿਆ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂਜੀ